ਹਨੇ ਸ਼ਲੋਕ ਮਹੱਲਾ ਤੀਜਾ ਸਤ ਗੁਰ ਮਿਲਿਆ ਭੁੱਖ ਗਈ ਤੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਸਾਧੂਰ ਕੇ ਮਿਲਿਆ ਭੁੱਖ ਗਈ ਸਾਡੀ ਤਾਂ ਵੀ ਚਲੀ ਗਈ ਸਤ ਮਿਲ ਗਿਆ ਸਾਨੂੰ ਹਾਂ ਹਾਂ ਬੀਤੀ ਮਿਲਿਆ ਉਹਦੀ ਚਲੀ ਗਈ ਤੇਖੀ ਭੁੱਖ ਨਾ ਜਾਏ ਜਿਹੜੇ ਦੂਏ ਲੋਕ ਨੇ ਜਿਹੜਾ ਉਹ ਮਿਲਿਆ ਦੀ ਮਿਲਿਆ ਹੈ ਨਹੀਂ ਵੇਖ ਪਾਇਆ ਕੀ ਭੁੱਖ ਨਾਲ ਜਾਏ। ਠੀਕ ਹੈ ਜੀ। ਫਿਰ ਘਰ ਕੇ ਸਾਧੂ ਦਾ ਭੁੱਖ ਵੀ ਜਾਂਦੀ ਹੈ। ਦੁਖੀ ਹੋਵੇ। ਸਾਰਿਆਂ ਦੇ ਅੰਦਰ ਦੁਖੀ ਹੋਏ ਨੇ, ਦੁੱਖ ਲੱਗੇ ਨੇ ਤਾਂ ਫਿਰ ਨੇ ਟੋਲਦੇ। ਸਤਿਗੁਰੂ ਅੱਛਾ ਜੀ। ਕਰ ਕਰ ਦੁੱਖ ਨੇ ਸਭ ਦੇ ਅੰਦਰ ਦੁੱਖ ਨੇ। ਇਹ ਤਾਂ ਕਦੂਰ ਨਹੀਂ ਨਾ ਹੋਏ। सगे दुख भी बिद दुख भी सजे गुरु सारा जीवन भी खराब करया दुख दुख फेर दुख दूर कर जाए तल भी होर होजू ता अंदर सहज ना आयो सहज ही लै खाए मन हट जिस ते मांगना लेना दुख मनाए ਉਧਰ ਟਕਾ ਨੀ ਆਇਆ ਟਿਕਿਆਂ ਦੀ ਬੋਲ ਅਟਕਿਆ ਹੀ ਨਹੀਂ ਟਿਕਦਾ ਤਾਂ ਟਿਕਦਾ ਆਇਓ ਹੀ ਲੈਠ ਹੋਇ ਸਹਿਜ ਅਵਸਥਾ ਤੋਂ ਬਿਨਾਂ ਪ੍ਰਾਪਤੀ ਨਹੀਂ ਸੀ ਹੁੰਦੀ ਜਿਹੜਾ ਹੋਈ ਹੈ ਜੀ ਉਹ ਨਹੀਂ ਸੱਚ ਕਾਦਾ ਉਹਨਾਂ ਜਿਸ ਤੇ ਮੁਗੜਾ ਮਨ ਹੱਥ ਕਰਕੇ ਵਗਦੇ ਨੇ ਨਾ ਜਿਵੇਂ ਦਰੁਪਲ ਰਾਧੇ ਦੀ ਲੈਣਾ ਦੁੱਖ ਮਨਾਈ ਉਹ ਦੁਖੀ ਹੁੰਦੇ ਨੇ ਉਹ ਦੁਖਣਾ ਬਲੂ ਹੁੰਦੇ ਨੇ ਦੁਖੀ ਰਹਿੰਦੇ ਨੇ ਕੁਝ ਨਹੀਂ ਬਣਦਾ ਹੈ ਜਦੋਂ ਨੇ ਕਲਤ ਭਾਰ ਖੜ ਗਿਆ ਉਹ ਸਭ ਖਾਣੀਆਂ ਝੁਕੀ ਜਦੋਂ ਵਾਲਿਆਂ ਨੂੰ ਜੀ ਸੱਚ ਬੋਲਿਆ ਉਹਨਾਂ ਨੇ ਸੱਚ ਠੀਕ ਹੈ ਜੀ ਹਾਂ ਜੀ ਕੁਝ ਦੇਖੇ ਭਲਾ ਜਿੱਥੋਂ ਕੋ ਸ਼ਬਦ ਰਤੇ ਤਿਨਾਂ ਸੋਜੀ ਪਈ ਦੂਜੇ ਭਰਮ ਪੁਲਾਏ ਕਿਸ ਭੇਖ ਦੇ ਨਾਲ ਉਤਲ ਜਿਹੜੋ ਭਲਾ ਗਰੀ ਸੀ ਜੱਗਾ ਹੈ ਜਿਹਦੇ ਵੇਖ ਲੈ ਪਾਇਆ ਜਿੱਥੋਂ ਬਹੁ ਵਸਾਏ ਜਿੱਥੋਂ ਕਿਸੇ ਨੂੰ ਕੋਈ ਪ੍ਰਸ਼ਾਦਾ ਪੱਖਿਆ ਮਿਲਦਾ ਜਾਂਦਾ ਜਿੱਥੋਂ ਕਿਸੇ ਨੂੰ ਕੋਈ ਘਾਣੂ ਮਿਲਦਾ ਜਾਂਦਾ ਹੋਵੇ ਸ਼ਬਦ ਰਤੇ ਤਿਨਾਂ ਸੋਜੀ ਪਈ ਦੂਜੇ ਭਰਮੀ ਪੁਲਾਏ ਸ਼ਬਦਾਂ ਤੇ ਤੈਨਾਂ ਨੂੰ ਸੋਚੀ ਪਈ ਜਿਹੜੇ ਸ਼ਬਦਾਂ ਰੰਗ ਚੜ ਗਏ ਉਹਨੂੰ ਇਹ ਸਮਝ ਆਈ ਹੈ ਜਿਹਨੋਂ ਪਰਦੇ ਵਿੱਚ ਤੇਰੇ ਵਰਦੇ ਇੱਕ ਰਸਤੀ ਆਦਮੀ ਬਾੜੇ ਨੇ ਅਸੀਂ ਚੰਗੇ ਰਸਤੀ ਕਾ ਨਹੀਂ ਹੋਈ ਰਸਤੀ ਵੀ ਕਿੰਨੇ ਤੁਹਾਡੇ ਨਾਲ ਜੇ ਤੁਹਾਨੂੰ ਕਮਾਏ ਪਾਏ ਕਿਰਤ ਕਾਇਨਾਤ ਕਿੰਦੂ ਜਾਏ ਇਹਦੇ ਤੇ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਵੀ ਨਹੀਂ ਕੁਝ ਕਹਿ ਸਕਦਾ ਕੋਈ ਨਹੀਂ ਦੇ ਸਕਦਾ ਫਿਰ ਤੁਸੀਂ ਸਾਡੇ ਕਵਾਉਂਦੇ ਫਿਰਦੇ ਨੇ ਨਾਨਕ ਜੋ ਉਸ ਸੁਭਾਵ ਹੈ ਜੋ ਭਲੇ ਜੋ ਪਰਮੇਸ਼ਰ ਨੂੰ ਕਹਉਂਦੇ ਨੇ ਜਿਹੜੀ ਕਰਤ ਪਰਮੇਸ਼ਰ ਨੂੰ ਕਹਉਂਦੀ ਹੈ ਜਿਹਨਾਂ ਦੀ ਉਹ ਚੰਗੀ ਫੈਸਲਾ ਉਹ ਅੱਗੇ ਜਾ ਕੇ ਜਿੱਦੇ ਬਾੜੇ ਦਾ ਸਕੇ ਠੂਠੇ ਦਾ wale jidi pat paave thai paave thai idi pat third party permission de karke odi kart theek hai jidi na paayi odi galti hai e faisla aage hovega asi ki kare faisle e bare koi theek hai mohalla tija sat gur ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ ਸਾਧੁਰ ਜੈਵੀਏ ਸਦਾ ਸੁਖ ਸਾਧੁਰ ਨੂੰ ਜੈਵੀਏ ਸਦਾ ਹੀ ਸੁਖ ਹੈ ਜਲਬਾਹਰ ਦੁੱਖ ਜਾਏ ਜਾਂਦਾ ਠੀਕ ਹੈ ਨਾ ਹੋਵੇ ਊਲਵੀ ਚਿੰਤਾ ਨਹੀਂ ਹੁੰਦੀ ਸਾਧੁਰ ਦੇ ਸੇਵਾ ਕਰਨ ਵਾਲੇ ਅਚਿੰਤ ਵਸਦਾ ਆਏ ਅਚਿੰਤਾ ਵਸਾ ਬੁੱਧ ਦੇ ਵਿੱਚ ਵੱਸ ਜਾਂਦੀ ਹੈ ਅਚਿੰਤ ਦੇ ਔਂਕਰ ਲਾਇਆ ਚਿੰਤ ਦਾ ਭਾਵ ਫਿਰ ਇੱਥੇ ਕਿਹਨੂੰ ਦੱਸਿਆ ਚਿੰਤ ਬਸਾ ਅਚਿੰਤ ਬਸਾ ਚਿੰਤ ਨਾਉਨ ਬਣਤਾ ਹੈ ਹਾਂ ਨਾਉਨ ਇਹ ਫਿਰ ਮੂਲ ਦੀ ਗੱਲ ਹੋ ਰਹੀ ਹੈ ਚਿੰਤ ਜਿਵੇਂ ਆਪਾਂ ਗੋਬਿੰਦੂ ਆ ਉਸ ਤਰ੍ਹਾਂ ਚਿੰਤ ਇੱਥੇ ਇੱਕ ਮੂਲ ਵਾਸਤੇ ਨਾਉਨ ਵਰਤ ਲਿਆ ਜੀ ਬਸ ਸਹਿਬਾਂ ਨਾਲ ਇਹ ਮੈਂ ਰੂਪ ਬਸਾ ਲਿਆ ਠੀਕ ਹੈ ਕਿੰਦਾ ਰਹਤ ਹਾਂਜੀ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ ਬੁਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਅਸਰ ਤੀਰਥ ਗਿਆਨ ਹੈ ਗਿਆਨ ਹੀ ਤੀਰਥ ਹੈ ਕੋ ਗਿਆਨ ਹੋ ਗਿਆ ਅਸੇ ਕਹਿੰਦੇ ਜਹਾਂ ਗਿਆਨ ਤਾਂ ਧਰਮ ਹੈ ਧਰਮ ਦੀ ਤੀਰਥ ਬਣਾਇਉਂਦੇ ਨੇ ਸਰਬੋਤਮ ਦਾ ਤੀਰਥ ਉਹ ਕਹਿੰਦੇ ਗਿਆਨ ਤੀਰਥ ਹੈ ਗਿਆਨ ਦੇ ਗਿਆਨ ਹੈ ਮੋਦੀ ਅੱਛਾ ਜੀ ਜੇ ਅਗਰ ਗਿਆਨ ਹੈ ਤੇ ਤੋਲੇ ਜਾ ਕੇ ਨਾਲੇ ਵਿੱਚ ਕਹਿੰਦਾ ਤੋਦੇ ਕਿ ਸਤਗੁਰ ਦੀਆ ਬੁਝਾਏ ਸਤਗੁਰ ਨੇ ਸਮਝਾਇਆ ਤੀਰਥ ਗਿਆਨ ਅਦਰ ਕਿਤਨਾ ਕੇ ਕਰਨ ਮਾਲ ਕੇ ਮਨ ਦੀ ਮਹਿਲ ਆਲਾ ਸਾਰੀ ਵਾਰ ਮਾਰੇ ਜੂ ਵਾਰ ਨੂੰ ਠੀਕ ਹੈ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਆਈ ਅਬ ਤੀਰਥ ਨੂੰ ਨਾਲ ਔਰ ਅਮਰਸਰ ਤੀਰ ਕੋਈ ਨਹੀਂ ਹੈਗਾ ਅਮਰਸਰ ਤੀਰ ਤੇ ਬਦਲਦਾ ਜਿਹੜਾ ਗਿਆਨਦਾਰ ਪੀਰ ਤਾਂ ਤੇਰੇ ਹੀ ਅਮਰਸਰ ਤੀਰ ਤੇ ਹੈ ਇਹ ਜਨਾਊਗਾ ਮਲਮਲ ਕੇ ਨਾ ਨਾ ਸਾਰੀ ਬੰਦੀ ਮਾਰ ਉੱਤਰ ਗੁਰਬਾਣੀ ਦਾ ਪਰਸਰ ਇਹ ਕਹਿੰਦੀ ਹੈ ਉਹ ਪਰਸਰ ਬਾਲਵੰਨ ਜੀ ਬੈਠੇ ਨੇ ਇਹ ਦੱਸ ਦਤਾ ਹੋਣਾ ਪਰ ਇਹ ਤਾਂ ਤੀਸਰੇ ਪਾਛਾ ਦਾ ਸ਼ਲੋਕ ਤੇ ਅਮਰਸਰ ਬਾਹਰ ਸ਼ਹਿਰ ਤਾਂ ਬਸਿਆ ਵੀ ਨਹੀਂ। ਆਈ ਤਾਂ ਗੱਲ ਹੈ ਕਿ ਇਹ ਕਹਿੰਦੇ ਫਿਰ ਹੋਰ ਵੀ ਬਾਬਰ ਬੱਜਦਾ ਪਾਣੀ ਪਹਿਲਾਂ ਹੋਰ ਨਾ ਦੇ ਕਰਕੇ ਦੇ ਨੇ ਬਾਹਰ ਹੀ ਬੁਲੀਖਦੇ ਜਿਹੜੀ ਆ ਗੱਲ ਕਹੀ ਗਿਆ ਤੀਜੇ ਬਾਦਸ਼ਾਹ ਨੇ ਬੋਲਦੇ ਇਹ ਤਾਂ ਹੈਡੇਟ ਸਰ ਤੇ ਸਿਹਾਰੀ ਹੈ ਅੰਮ੍ਰਿਤ ਸਰ ਕਹਿੰਦਾ ਭਾਵ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਤੀਰਥ ਨਾਏ मैल गई निर्मल ਹੋਆ ਇਹ ਅਸਲੀ ਅਮਰਸਰ ਦਾ ਤੀਰਥ ਹੈ ਜੀ ਹਾਂ ਇਹ ਹੈ ਕਿ ਜੇ ਆਕੇ ਪਾਪੜ ਬਚੂ ਸਾਡਾ ਤਾਂ ਕਰੋਨਾ ਮੈਂ ਬਜਟ ਵੀ ਗਿਆ ਹਾਂ ਜੀ ਉਹ ਬੜੀ ਦੁੱਖੀ ਹੋਈ ਕਿ ਕਹਿੰਿਆ ਜੀ ਹਾਂਜੀ ਸੱਜਣ ਮਿਲੇ ਸੱਜਣਾ ਸੱਚੇ ਗੁਰੂ ਗੁਰੂ ਖਾਲਸਾ ਨੂੰ ਜene ਕੋ ਸੁਭਾਅ ਦੇ ਆਦਮੀ ਬਣਦੇ ਨੇ ਸੱਜਣਾ ਸੱਚੇ ਸ਼ਬਦ ਸੁਭਾਅ ਹੈ ਸੱਜਣਾ ਦਾ ਸੁਭਾਅ ਬੋਲੀ ਮਿਲ ਗਈ ਸੁਭਾਅ ਮਿਲ ਗਿਆ ਸੱਜਣਾ ਮਿਲ ਗਏ ਪਰਚਾ ਦੇ ਘਰ ਦੇ ਵਿੱਚ ਹੀ ਪਰਚਕੇ ਦੋਏ ਇੱਕ ਨਾਲ ਜੋਤੀ ਜੋਤ ਮਿ ਇੱਥੇ ਸਰਬੰਧੀ ਜਦੋਂ ਉਹਦੀ ਇੱਕਤਾ ਹੋ ਜਾਂਦੀ ਹੈ ਸੱਜਣ ਹੋ ਜਾਂਦੇ ਨੇ ਤੇ ਕੋਈ ਦੀ ਲੋੜ ਨਹੀਂ ਬਾਹਰੋਂ ਕੁਝ ਦੀ ਲੋੜ ਨਹੀਂ ਪਰਚੀ ਕਰਦੇ ਕਰਦੇ ਰਹੇ ਨੇ ਧਾਰੀ ਪਰਚਾ ਪਾਇਆ ਸ਼ਬਦ ਜੋਤ ਬਣਾਈ ਜੋਤ ਜੋਤ ਬਣ ਜਾਂਦੀ ਜੋਤ ਇੱਥੇ ਮਨ ਨੂੰ ਕਿਹਾ ਤਾਂ ਜੋਤਿ ਚਿੱਤ ਹੈ ਇਹ ਦੋਏ ਆਪਸ ਵਿੱਚ ਮਿਲ ਜਾਂਦੇ ਹਾਂ ਜੀ ਉਹ ਇੱਕ ਇੱਕ ਉਹ ਹੁੰਦੀ ਠੀਕ ਹੈ ਪਖੰਡ ਜਮਕਾਲ ਨਾ ਛੋੜਈ ਲੈ ਜਾਸੀ ਪੱਤ ਨਾਨਕ ਨਾਮ ਰਤੇ ਸੇ ਉੱਭਰੇ ਸੱਚੇ ਸਿਉ ਲਿਵ ਲਾਇ ਪਖੰਡ ਜਮਕਾਲ ਨਾ ਛੋੜੀ ਪਖੰਡੀ ਪਖ ਕਰਦੇ ਨੇ ਹਾਂਜੀ ਪਖੰਡੀ ਜਮਕਾਲ ਨਾ ਛੋੜੀ ਜਮਕਾਲ ਨਹੀਂ ਛੱਡਦਾ ਠੀਕ ਹੈ ਜੀ ਲੈ ਜਾਸੀ ਗਵਾਏ ਲੈ ਜਾਂਦਾ ਨਾਲੇ ਪੱਤ ਵੀ ਗਵਾਉਂਦਾ ਬੇਇਤੀ ਕਰਕੇ ਲੈ ਜਾਂਦਾ ਨਾਮਿਕ ਨਾਮ ਰੱਤੇ ਸੇ ਉਬਰੇ ਸੱਚੇ ਸਿਉ ਲਿਬਲਾਈ ਹਕਤਾਂ ਆਂ ਯਾ ਲੋਭ ਨਾਲਿਆ ਹੋਰ ਉਹਨੇ ਉਬਰੇ ਰਿਓ ਬਚੇ ਸੱਚੇ ਨਾਲੇ ਲਿਬ ਲੱਗੀ ਕਾਰਨ ਠੀਕ ਹੈ ਸੱਚੇ ਨਾਲੇ ਲਿਬ ਲੱਗ ਕਾਰਨ ਤੇਰਾ ਆਤਮਾ ਜੀ ਨਾਮ ਨਾਲ ਰੱਤਣਾ ਕਹਿਣ ਦਾ ਸੱਚੇ ਦੇ ਨਾਲ ਲਿਬ ਲੱਗਦੀ ਹੈ ਨਾਮ ਕਰਕੇ ਜੀ ਹਾਂ ਹਾਂ ਉਦਲੇ ਠੀਕ ਹੈ ਜੀ ਪੌੜੀ ਤਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਹਰ ਨਾਮ ਬਿਲੋਈਏ ਸਹਜੇ ਹੀ ਹਰ ਨਾਮ ਲਿਓ ਹਰ ਤਤ ਨਖ ਹੋਈਏ ਤਤ ਜਾਏ ਬਹੁ ਸਤ ਸੰਗਤੀ ਇਹ ਸਤ ਸੁਭੀ ਉਹ ਜਗ੍ਹਾ ਜਾ ਕੇ ਬੈਠੋ ਜਿੱਥੇ ਹਰ ਕਾ ਲੋਗ ਬਿਲੋਈਏ ਜਿੱਤੇ ਹਰ ਕਾ ਬਿਲੋਈਦਾ ਨਾ ਲੜਕੀ ਦਾ ਵਿਚਾਰੀ ਦਾ ਸੰਗਤ ਚੌਥੇ ਜਾ ਕੇ ਬੈਠੋ ਹਰ ਕਾ ਨਾਮ ਬੁਲਾਉਣਾ ਆਲਸਾ ਵਿਚਾਰਨ ਤਤ ਦੇ ਹਰ ਨਾਮ ਲਿਓ ਹਰ ਤਤ ਨਾ ਖੋਈਏ ਤੂੰ ਜਿੱਤੇ ਆਰਾਮ ਨਾਲ ਇਕਮਲ ਵਿੱਚ ਜਿੱਤ ਹੋ ਕੇ ਸੁਣੋ ਕੇ ਔਰ ਹਰ ਕਾਰ ਨੂੰ ਜੋ ਬਲੋਕ ਬੁਲਾਇਆ ਜਾਂਦਾ ਉਹ ਲੈ ਲਿਓ ਤੂੰ ਸਮਝ ਲਿਓ ਜੇਦੇ ਸਹਜ ਹੀ ਹਰ ਨਾਮ ਲਿਓ ਹਰ ਤਤ ਹਰ ਤਤ ਨੂੰ ਹੋਈਏ ਕਿਤੇ ਉਹਦਾ ਤਤ ਨਾ ਖੋਜਵੇ ਧਿਆਨ ਰੱਖਿਓ ਇਹਨ ਸਹਜ ਵਸਤਾ ਕਿਤੇ ਤੱਤ ਦੀ ਗੱਲ ਕਰ ਤੇ ਤੁਹਾਡੇ ਦੇ ਪਰਾਹ ਚ ਵੇਖੋ ਨਾ ਜਾਵੇ ਸਾਰੇ ਸ਼ਬਦ ਦਾ ਤੱਤ ਹੈ ਜੋ ਸਾਰੰਸ਼ ਹੈ ਉਹ ਉਹ ਪ੍ਰਾਪਤ ਕਰ ਲੋ ਠੀਕ ਹੈ ਨਿਤ ਜਪਿਓ ਹਰ ਹਰ ਦਿਨ ਸ ਰਾਤ ਦਰਗਾ ਦੇ ਆਸਰਾ ਮਿਲੇ ਆਸਰਾ ਮਿਲੇ ਆ ਦਰਗਾਹ ਜਗਾ ਮਿਲੀ ਹੈ ਇਹ ਸੋ ਪਾਇ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਈ ਲਾਟ ਲਿਖੋਈ ਹੈ ਸੋ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਖੋਈ ਹੈ ਪ੍ਰਾਪਤੀ ਜੀ ਨੂੰ ਹੁੰਦੀ ਹੈ ਪੂਰੇ ਸਤਿਗੁਰੂ ਨੂੰ ਹੁੰਦੀ ਹੈ ਇਹ ਤੁਰ ਦੇ ਵਿੱਚ ਲਿਖਾ ਕੇ ਲਿਆਇਆ ਜੋ ਉਸ ਗ੍ਰੰਥ ਵਸਤੂ ਦੇ ਵਿੱਚ ਆਪਣੀ ਦੇ ਲਾੜ ਦੇ ਵਿੱਚ ਲਿਖਾ ਕੇ ਲਿਆਇਆ ਹੈ ਤਾਂ ਕਿਤੇ ਪ੍ਰਾਪਤੀ ਹੁੰਦੀ ਹੈ ਠੀਕ ਹੈ ਜੀ ਉਹਨੂੰ ਪਰ ਪੂਰੇ ਸਤਿਗੁਰੂ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਏ ਇਸ ਗੁਰ ਸਭ ਨਮਸਕਾਰ ਕਰੋ ਇਸ ਗੁਰ ਰੇਰ ਨਮਸਕਾਰ ਕਰੋ ਉਸ ਲਈ ਹੈ ਦਲੋਈ ਹੈ ਸਮਝਾਈ ਹੈ ਹਰ ਵੀ ਗੱਲ ਹਰ ਕੀ ਕਥਾ ਠੀਕ ਹੈ ਥੋੜੀ ਬਹੁਤੀ ਗੱਲ ਪਟਕਲੋਕ ਕੀਤੀ ਹੈ ਚਲਾਈ ਹੈ ਗੱਲ ਗਲ ਹੋਈ ਹੈ ਚਲਾਈ ਹੈ ਉਹਦੀ ਗੱਲ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਹੈ